ਸ਼ਲੋਕ ਸ਼ਲੋਕ ਦੇ ਮੇਰੇ ਮਹੱਲਾ ਨਾਂ ਲਿਖਿਆ ਹੋਣ ਦਾ ਕਾਰਨ ਇਹ ਹੈ ਕਿ ਪੰਜਵੇਂ ਪਾਸਟਾ ਦੀ ਵਾਰ ਹੈ ਦੀ ਸਾਡੀ ਵਾਰ ਹੈ ਉਹਨਾਂ ਦੀ ਇਸਨੂੰ ਸ਼ਲੋਕਾਂ ਨਾਲ ਪਹਿਲਾਂ ਲਿਖੇ ਦਿੱਤਾ ਵਾਰ ਸ਼ਲੋਕਾਂ ਨਾਲ ਹੋਰ ਜਿਹੜੇ ਸ਼ਲੋਕ ਨਾਲ ਆ ਜਾਂਦਾ ਸ਼ਲੋਕ ਰੰਚਿਤ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਹਾਂ ਨਾਨਕ ਮਹਾ ਅਗਨ ਨਾ ਬਿਨਾਸਨੰਦ ਰਚੰਤ ਜੀ ਰਚਨਾ ਜਿਹੜੇ ਜੀ ਨੂੰ ਰਚਨਾ ਦੇ ਵਿਚਾਰ ਲਾਇਆ ਤਾਂ ਮਾਤ ਗਰਭ ਦੇ ਵਿੱਚ ਸਾਬਤ ਕਰਨਾ ਪਿਆ ਅੱਛਾ ਮਾਤ ਗਰਭ ਦੇ ਤੇ ਬਨਾ ਜੀ ਰਚਨਾ ਦੇ ਵਿੱਚ ਰਚ ਨਹੀਂ ਸਕਦਾ ਸਾਹ ਸਾਹ ਹੁੰਦੇ ਸਿਮਰਦਾ ਰਹਿੰਦਾ ਦਾ ਸਾਹ ਸਾਹ ਉਹਦੇ ਨਾਲ ਜੁੜਿਆ ਰਹਿੰਦਾ ਸੀਗਾ ਧਿਆਨ ਉਹਦੇ ਵਿੱਚ ਇਹ ਰਹਿਦਾ ਦਾ ਨਾ ਅਗਨ ਨਾ ਬਿਨਾ ਤਾਂ ਇਸ ਕਰਕੇ ਉਹ ਸਦਨ ਦੇ ਵਿੱਚ ਇਹਦਾ ਨਾਸ ਨਹੀਂ ਹੋਇਆ ਜੇ ਸਾਥ-ਸਾਥ ਹੁਣ ਉਹਦੇ ਨਾਲ ਜੁੜੇ ਰਹੀਏ ਤਾਂ ਇੱਥੇ ਹੁਣ ਵੀ ਨਾਸ ਹੁੰਦਾ ਜੋ ਜੀ ਜਾਣ ਭਜੈ ਪਰ ਖੋਤਮ ਕਿਸਕਾ ਕਝੂ ਨਾ ਨਾਸਾ ਵੀ ਨਾਸ ਨਹੀਂ ਹੁੰਦਾ ਜਿਹੜਾ ਕੱਲ ਜਾਣ ਕੇ ਫਿਰ ਜੁੜੇ ਜਾਣੇ ਦੇ ਬਿਨਾ ਤਾਂ ਜੁੜਿਆ ਹੀ ਜਾ ਸਕਦਾ ਇਹ ਤਾਂ ਐਵੇਂ ਹਵਾ ਚੇਰਾਦ ਨਾਲ ਕਰਦੇ ਨੇ ਅੰਤਾ ਦੇ ਨਾਲ ਕਿਉਂਕਿ ਹਾਂਜੀ ਤੇ ਏਥੇ ਲਿਖਿਆ ਸਾਥ-ਸਾਥ ਸਿਮਰਨ ਤੱਕ ਪਰ ਜਦੋਂ ਕਹਿੰਦੇ ਜੇ ਤੇ ਰੱਖ ਉਹ ਕਿਹੜੀ ਅਵਸਥਾ ਹੈ ਫਿਰ ਉਸ ਤੋਂ ਪਹਿਲਾਂ ਦੀ ਹੈ ਦੇਖੋ ਸਾਈਡ ਤੇ ਮੇਦਾ ਤੇ ਹਾਂਜੀ ਸਾੜੇ ਟੈਂਪਰੇਚਰ ਹੋ ਰਹੀ ਹੈ ਉੱਤੇ ਮਾਸ ਖਾਤਾ ਰਿਹਾ ਜਵਾਬ ਤਾਂ ਆਪਣੇ ਕੋਲ ਹੈ ਨਹੀਂ ਤੇ ਕਿਉਂ ਹੋ ਰਿਹਾ ਦਾ ਜਵਾਬ ਨਹੀਂ ਹੈ ਅੰਦਰ ਜਰੂਰੀ ਨਹੀਂ ਹੈ ਦੋ ਆ ਕਰਨ ਦਾ ਮਤਲਬ ਹੈ ਅਗਰ ਨਹੀਂ ਕੁਝ ਕਰ ਸਕਦੀ ਅਸਨ ਦੇ ਵਿੱਚ ਬਣ ਵੀ ਰਿਹਾ ਅਸਨ ਚ ਹਜਮ ਵੀ ਹੋ ਰਿਹਾ ਮੁਖ ਤਲੈ ਪੈਰ ਉਪਰੇ ਵਸੰਦੋ ਕੁ ਹੱਥੜੇ ਥਾਂਏ ਉਧਰ ਹੈ ਜਿਸ ਦੈ ਨਾਹੀਂ ਉਥੇ ਕਹਿੰਦੇ ਗਲਬ ਦੇ ਵਿੱਚ ਮੂੰਹ ਦੇ ਉੱਤੇ ਮੁਖ ਤਲੈ ਪੈਰ ਉਪਰੋ ਪੈਰ ਮੂੰਹ ਦੇ ਉੱਤੇ ਰੱਖਿਆ ਹੋਇਆ ਜਿਵੇਂ ਆ ਲੇਟਿਆ ਹੈ ਨਾ ਹਾਂ ਜੀ ਪੈਰ ਮੋੜ ਕੇ ਮੂੰਹ ਦੇ ਉੱਤੇ ਆਏ ਹੋਏ ਨੇ ਲੱਗੇ ਹੋਏ ਨੇ ਮੁੱਖ ਤਾਂ ਲੈ ਉੱਤੇ ਪੈਲਦੇ ਆਏ ਪਿਆ ਹੋਇਆ ਨਾਲ ਕਸੂਤਾਂ ਗੇਂ ਉਸ ਤਵੇ ਨੂੰ ਕਿਉਂ ਵਿਸਾਰਨਾ ਚਾਹੀਦਾ ਉਸ ਮਾਲਕ ਨੂੰ ਕਿਉਂ ਵਿਸਾਰੀਏ ਜਿਹੜਾ ਐਸੀ ਜਗ੍ਹਾ ਦੇ ਵਿੱਚ ਵੀ ਤੈਨੂੰ ਲੈ ਆਇਆ ਕੱਢ ਕੇ ਜਿਉਂਦੇ ਨੂੰ ਉਧਾਰ ਕਰਤਾ ਉਹਨੂੰ ਨਹੀਂ ਵੇਚਾਲਣਾ ਚਾਹੀਦਾ ਹੁਣ ਕਿਉਂ ਵਿਸਾਰਿਆ ਹੁਣ ਤਾਂ ਤੂੰ ਬਣਾ ਸੌਖਾ ਲੋਕੀ ਜਿਹਾ ਰਹਿਣਾ ਥੁਰਦਾ ਫਿਰਦਾ ਹੈ ਕਰਦਾ ਬਾਗਾਂ ਉਹ ਜਿਹੜਾ ਐ ਜਿੱਥੋਂ ਵੀ ਰੱਖ ਸਕਦਾ ਉਹ ਹੁਣ ਕਿਉਂ ਨਹੀਂ ਵੇਚ ਸਕਦਾ ਕਿਉਂ ਤੈਨੂੰ ਵਿਪਰੋਸਗੀ ਹੋਗੀ ਆ ਗੱਲ ਹੈ ਠੀਕ ਹੈ ਇਹ ਉਹਨਾਂ ਕੋਲ ਤਾਂ ਜਾਣਦੀ ਉਹ ਗੱਲ ਹੈ ਜੀ ਉਹਨਾਂ ਕੋਲ ਕਿਹੜੀ ਕੋਈ ਪਿਕਚਰ ਸੀ ਹੁਣ ਤਾਂ ਦੱਸ ਦਿੰਨੇ ਆ ਵੀ ਇਸ ਤਰ੍ਹਾਂ ਗਰਮ ਵਿੱਚ ਉਹਨਾਂ ਕੋਲ ਕੀ ਸੀ ਉਹਨੋ ਆਤਮ ਗਿਆਨ ਆਪਾਂ ਨੂੰ ਹੁਣ ਤਾਂ ਪਤਾ ਹੀ ਨਹੀਂ ਹਾਂਜੀ ਆਤਮ ਗਿਆਨ ਉਹ ਮਾਇਆ ਤੋਂ ਪਾ ਵਾਲੀ ਬੁੱਧੀ ਸੀ ਉਹਨਾਂ ਕੋਲ ਮਾਰਵਤੀ ਜੀ ਉਹਨਾਂ ਕੋ ਬੁੱਧੀ ਮਾਇਆ ਦੇਖ ਲੈਂਦੀ ਸੀ ਨਾਮ ਨਾਲ ਇਹ ਆਧਾਰ ਹੁੰਦਾ ਹੋ ਜਾਂਦਾ ਹੈ ਤੂੰ ਜਸਤ ਕਰ ਅੱਲਾਹਾਰੇ ਗਰੀਦ ਤੈਨੂੰ ਹਾਂਜੀ ਪੌੜੀ ਰਕਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ ਉਰਦ ਮੁਖ ਕੁਚੀਲ ਵਿਕਲ ਨਰਕ ਘੋਰ ਗੁਬਾਰ ਅਕੋਣ ਉਤਪਤੀ ਦੀ ਗੱਲ ਦੱਸਣੀ ਸੀ ਜੰਮਣ ਮਰਨਾ ਦੱਸਣਾ ਸੀਗਾ ਹੁਣ ਉਹ ਵੀ ਜੇ ਹੁਣ ਇਹਦੀ ਉਹ ਜਿਵੇਂ ਕਹਿੰਦੇ ਨੇ ਤ੍ਰਿਆ ਵਿਸ਼ਾ ਸਾਡਾ ਹੁਣ ਕੀ ਕਰੀਏ ਹੁਣ ਕੋਈ ਤਾਂ ਕਹਿ ਦੂ ਵੀ ਕੀ ਲੋੜ ਸੀ ਨਾ ਕਹਿੰਦੇ ਗੱਲ ਕੀ ਫਰਕ ਪੈਂਦਾ ਸੀ ਬਥੇਰਾ ਸੀਗਾ ਗੁਰੂ ਗ੍ਰੰਥ ਸਾਹਿਬ ਹਾਂਜੀ ਆ ਨਾ ਇਹ ਕੀ ਕਹਿ ਲੂਗਾ ਜਦ ਇਹ ਕੀ ਲੋੜ ਹੈ ਇਹ ਇਹਦਾ ਕੀ ਪਿੱਛੇ ਪ੍ਰਮਾਣ ਲੈ ਕੇ ਆਏ ਨੇ ਕੀ ਤਸੱਲੀ ਦੇ ਕੇ ਤੈਨੂੰ ਕਿਉਂ ਆਦਿ ਮਨਾਇਆ ਹੈ ਵੀ ਤੂੰ ਇਹ ਜੇ ਦਾ ਜਿਹੜਾ ਇਹ ਜੇ ਥਾਂ ਵੀ ਰੱਖ ਸਕਦਾ ਉਹਨੂੰ ਬਿਠਾਰਿਆ ਹੋਇਆ ਕਿਉਂ ਦਲੀਲ ਦੇ ਵਿੱਚ ਦੇਖੋ ਵੀ ਕੀ ਵਜ਼ਨ ਹੈ ਮਾਇਆ ਦੇ ਵਿੱਚ ਕਿਵੇਂ ਤੂੰ ਪ੍ਰਵੇਸ਼ ਕੀਤਾ ਤੇ ਉਸ ਤੋਂ ਬਾਅਦ ਤੇਰੀ ਕੀ ਹਾਲਤ ਸੀ ਹੁਣ ਤੈਨੂੰ ਕੀ ਕਰਨਾ ਚਾਹੀਦਾ ਬਿਨਾਂ ਦੱਸੇ ਤੇ ਦੱਸ ਕਿਵੇਂ ਫਰਦਾ ਕਿਵੇਂ ਹੈ ਉਹਨੂੰ ਗਿਆਨ ਕਿਵੇਂ ਹੋਊਗਾ ਕਿਨ ਲੋਗ ਦਾ ਗਿਆਨ ਦੇਣਾ ਕਿਵੇਂ ਦਾ ਜਿਹੜਾ ਗਿਆਨ ਹੈ ਇਹਦੇ ਵਿੱਚ ਕੋਈ ਸਰੀਰਤਾ ਵਾਲੀ ਗੱਲ ਨਹੀਂ ਹੁੰਦੀ ਹਨ ਜੀ ਉਹ ਮੇਰੇ ਬੈਦ ਗੁਰੂ ਕੋਲ ਬੰਦਾ ਡਾਕਟਰੀ ਦੇ ਵਿੱਚ ਸਰੀਰਤਾ ਅਗਨ ਉਧਰ ਮਝਾਰ ਅਗਨ ਉਧਰ ਮਝਾਰ ਹੋ ਪੇਟ ਉਧਰ ਪੇਟ ਹੀ ਆ ਪੇਟ ਦੇ ਵਿੱਚ ਹੀ ਸ਼ੁਰੂ ਹੋਇਆ ਰક્ત اور ਬਿੰਦ ਮਾਪੇ ਬਣ ਹੋਇਆ ਹਾਂ ਬਲਕੇ ਉਹ ਜਿਹੜਾ ਸ਼ੁਰੂ ਹੋਇਆ ਨਿਰਵਾਣ ਉੱਤੇ ਅਗਨ ਵੀ ਹੈ ਉਧਰ ਦੀ ਅਗਨ ਹੈ ਉਧਰ ਦੀ ਅਗਨ ਤੱਕ ਗੜਨ ਦੀ ਸਭ ਕੁਝ ਇਹ ਗੜਨ ਦੀ ਲਈ ਨਰਕ ਘੋਰ ਗਵਾਰ ਜਿੱਥੇ ਇਹਦਾ ਮੂੰਹ ਦੇ ਉੱਤੇ ਜੋ ਪਾਣੀ ਜਾੜੇ ਵਗੈਰਾ ਉਹ ਆਪਾਂ ਹੁਣ ਉਹਨੂੰ ਜੀਵੇ ਉਹਨੂੰ ਖੁਤੀਲ ਬੰਦੇ ਨੇ ਬਸ ਤਲਵਾ ਖੁਤੀਲ ਜ ਹੈ ਉਹ ਜਿੰਦਗੀ ਸਮਝੋ ਹਾਂਜੀ ਉੱਥੇ ਹੀ ਉਹ ਸਭ ਕੁਝ ਉਹਦੇ ਵਿੱਚੋਂ ਬਣਿਆ ਹੈ ਤੂੰ ਉਹਦੇ ਕੁਚੀਲ ਵਿਕਲ ਸੀ ਨਰਕ ਕੋ ਹੋਰ ਕੋ ਬਾਤ ਬਿਲਕੁਲ ਨਹੀਂ ਨਹੀਂ ਸੀ ਤੈਨੂੰ ਅੱਖਾਂ ਬੰਦ ਸੀਆਂ ਕੰਨ ਬੰਦ ਸੀ ਗਿਆਨ ਅੰਦਰ ਇਸ ਕੋਈ ਉਹ ਨਹੀਂ ਸੀ ਕੰਮ ਕਰਦਾ ਕੋਰ ਕੋ ਬਾਤ ਦੇ ਸੀ ਪਰ ਤੂੰ ਜੁੜਿਆ ਹੀ ਤੂੰ ਉਹਦੇ ਨਾਲ ਹੋਇਆ ਸੀ ਸਰੀਰਾਨੀ ਸੀ ਤੇ ਕੁੜੀ ਦੇ ਵਿੱਚ ਨਹੀਂ ਸੀ ਜੁੜਿਆ ਹੋਇਆ ਕੋਈ ਸ਼ਬਦ ਆਪਣੇ ਮੂਰ ਨਾਲ ਜੁੜਿਆ ਹੈ ਹਾਂਜੀ ਕੀ ਕੇ ਪਰ ਉੱਥੇ ਜਦੋਂ ਕਹਿੰਦੇ ਆਂ ਤੁਰਦ ਤਪ ਕਰਦਾ ਮਤਲਬ ਆਇਆ ਨਾ ਜਿਹੜੇ ਤਪ ਜਿਹੜੇ ਉਹ ਕਰਦਾ ਤਾਂ ਮੂਰਲਾ ਵੀ ਜਿਹੜੇ ਆਇਆ ਤਾਂ ਮਾਇਆ ਨਾਲ ਜੁੜ ਰਿਹਾ ਸੀ ਮਾਇਆ ਨਾਲ ਜੁੜਨ ਵਾਸਤੇ ਜੇ ਤਪਾ ਉਰਤਦਾ ਦੂਰ ਹੋ ਤੂੰ ਉਹ ਅੱਗ ਦੇ ਨਹੀਂ ਕੁਝ ਹੁਣ ਤੇਰੀ ਅੱਗ ਕੀ ਕਹੇ ਤੈਨੂੰ ਉਹ ਪੇੜ ਦੀ ਅੱਗ ਖਾਤਰ ਤੇਰੀ ਤ੍ਰਿਸ਼ਨਾ ਹੈ ਪੇੜ ਦੀ ਭੁੱਖ ਕਰਕੇ ਤ੍ਰਿਸ਼ਨਾ ਲਾਈ ਹੋਈ ਕੁਣ ਮੈਨੂੰ ਤੈਨੂੰ ਤ੍ਰੇਨਾ ਕੁਛ ਕਹਿੰਦੀ ਨਾ ਪੇੜ ਦੀ ਪੁੱਕ ਕੁਛ ਖਾਏ ਇਸ ਗੱਲ ਨੂੰ ਬਿਜਲੇ ਉਹ ਦੁਆਪਰ ਦੀ ਗਰਵ ਦੀ ਗੱਲ ਨੂੰ ਯਾਦ ਕਰਕੇ ਤੂੰ ਹਿਰਦੇ ਚ ਪੱਕਾ ਕਰ ਲੈ ਮੰਨ ਲੈ ਪਰੋਸਾ ਕਰ ਲੈ ਵੀ ਤੈਨੂੰ ਕੁਝ ਨਹੀਂ ਕਰ ਸਕੂਗੀ ਅੱਜ ਤੂੰ ਆਪਣੇ ਮੂਰ ਨਾਲ ਜੁੜਿਆ ਰਹਿ ਇਹਦਾ ਹਾਲਾਜ ਹੋ ਸਕਦਾ ਹੈ ਇਹ ਜਾਲੂ ਤੇਰੀ ਬੁੱਝ ਸਕਦੀ ਹੈ ਆਰਾਮੋਦਕ ਜਿਹੜਾ ਹੁੰਦਾ ਰਾਹੋਦਕ ਪਰਿਤੀ ਖਾਬੂਜਾਈਂ ਗਿਆਨ ਵਰ ਬਣਨਾ ਆਰਾਮੋਦਕ ਹੈ ਇਹਦੇ ਨਾਲ ਤੇਰੀ ਤੇ ਇਹ ਜੇ ਪੀਰ ਕਰ ਹਾਂਜੀ ਬਿਕਮ ਥਾਨੋਂ ਜਿਨੀ ਨਾ ਵਿਚਾਰ ਪ੍ਰਭ ਬਿਸਰਤ ਸੁਖ ਕਦੇ ਨਹੀਂ ਜਾਸਨ ਜਨਮ ਹਾਰ ਦੇਖ ਲੋ ਦੇ ਵਿੱਚ ਜਿਹਨੇ ਤੈਨੂੰ ਰੱਖਿਆ ਕੀਤੀ ਉੱਥੇ ਰੱਖ ਲਿਆ ਬਾਹਰ ਜਿਉਂਦਾ ਫੇਰ ਆ ਗਿਆ ਤੂੰ ਤਿਸ ਤਿੰਨਾਂ ਭੁੱਲਣਾ ਚਾਹੀਦਾ ਤੈਨੂੰ ਵਿਸਾਰਨਾ ਚਾਹੀਦਾ ਪ੍ਰਭ ਬਿਸਰਤ ਸੁਖ ਕਦੇ ਨਹੀਂ ਕਹਿੰਦੇ ਪ੍ਰਭ ਜੋព្រਕੇ ਜਿਹੜੇ ਬਿਸਰ ਜਾਂਦੇ ਨੇ ਉਹਨਾਂ ਨੂੰ ਕਿਸੇ ਘੜੀ ਵੀ ਸੁੱਖ ਨਹੀਂ ਮਿਲਦਾ ਜਾਂ ਜਨਮ ਹਾਰ ਹੋਤਾ ਜਨਮ ਹਾਰ ਦੀ ਬਾਜੀ ਹਾਰ ਕੇ ਜਾਂਦੇ ਨੇ ਜਿਹੜਾ ਜਨਮ ਹੀਰਾ ਜੈਸਾ ਜਨਮ ਬਦਲੇ ਵਾਸਤੇ ਚਲੇ ਜਾਂਦੇ ਨੇ ਜਿਹੜੇ ਚਲੇ ਜਾਂਦੇ ਤੂੰ ਇਹ ਕੰਮ ਨਹੀਂ ਕਰਨਾ ਉਹ ਸਿੱਖਾਂ ਨੇ ਕੰਮ ਨਹੀਂ ਕਰਨਾ ਹੈਗਾ ਹਾਂਜੀ ਠੀਕ ਹੋ ਜੀ ਪ੍ਰਭ ਬਿਸਤਰਾ ਸੁੱਖ ਕਦੇ ਨਾ ਹੀ ਜਾਂਸਨ ਜਨਮ ਹਾਰ ਇੱਥੇ ਦੂਸਰੀ ਪੌੜੀ ਦੀ ਸਮਾਪਤੀ ਹੈ ਜੀ